ਸ਼ਲੋਕ ਮਹੱਲਾ 5ਵਾਂ ਜਾਂ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ ਜਾਂ ਤੂੰ ਤੁਸੈ ਮਿਹਰਬਾਨ ਨੌ ਨਿਧੀ ਘਰ ਮੈਂ ਪਾਈ ਜਾਂ ਤੂੰ ਦਰੁਠ ਹੈ ਤਰੁਠ ਹੈ ਤੁਸੈ ਕਹਿਤਾ ਅੱਛਾ ਜੀ ਜੇ ਤੂੰ પ્રસન્ન ਹੋਜੇ ਮੈਂ ਖੁਸ਼ ਹੋਜੇ ਮੈਂ ਮਿਹਰਬਾਨ ਕਿਦਾਂ ਰਹਦੋਗੇ ਮਨ ਵਿੱਚ ਵਸਦਾ ਮਿਹਰਬਾਨ ਹੋਣ ਇੱਕ ਮਿਹਰਬਾਨ ਹੋ ਕੇ ਕੁਝ ਦੇ ਅੱਛਾ ਜੀ ਜਾਂ ਤੂੰ ਤੁਸੈ ਮਿਹਰਬਾਨ ਨੌ ਨਿਧੀ ਘਰ ਮੈਂ ਪਾਈ ਨਾਵ ਨੇ ਵੀ ਕਰਦੇ ਵਿੱਚ ਪੈ ਜਾਂਦੀ ਹੈ ਨਾ ਮਾ ਖਜ਼ਾਨਾ ਨਾ ਨਿੱਦਾ ਵੰਦ ਨਾ ਉਹ ਪ੍ਰਕਾਰ ਦੀ ਭਗਤੀ ਦੀ ਹੈ ਨਾ ਖਜ਼ਾਨੇ ਨਹੀਂ ਹੁੰਦੇ ਅੱਛਾ ਜੇ ਜੇ ਨਾਉ ਮਾਇਆ ਹੈ ਉਹ ਤੇ ਤਾਂ ਮਾਇਆ ਜੇ ਰਹੇਗਾ ਠੀਕ ਹੈ ਨਾਉ ਦੇ ਨਾ ਖਜ਼ਾਨਾ ਮਿਲ ਜਾਂਦਾ ਬ੍ਰਹਮ ਗਿਆਨ ਦਾ ਦੁਭ ਗਿਆਨ ਹੁੰਦਾ ਨਾਉ ਨੇ ਅੰਮ੍ਰਿਤ ਪ੍ਰਭ ਨਾਮ ਇਹ ਪ੍ਰਭ ਨਾਮ ਹੈ ਹੀ ਨਾਉ ਦੀਦੀ ਇੱਕ ਵਚਨ ਹੈ ਇਹਨਾਂ ਨੇ 9000 ਦੇ ਕਦੇ ਕਰਤੇ ਦੀਦੀ ਦਾ ਇੱਕ ਵਚਨ ਹਾਂਜੀ ਨਾਮ ਰਬ ਦਾ ਨਾਮ ਲੱਗਿਆ ਹੋਇਆ ਇਹਦੇ ਨਾਲ ਨਾਲ ਦਿੱਤੀ ਅਮਰਤ ਰਬ ਨਾਮ ਧੁਮਖਿਆ ਨਾਮ ਦੀਦੀ ਇੱਕ ਵਚਨ ਹੈ ਨਾਮ ਦਿੱਤੀਆਂ ਅਰਥ ਕਰਤਾ ਸਾਲ ਸਵੇ ਵਿਆਕਰਣ ਬਣਾਈ ਸੀ ਵਿਆਕਰਣ ਕਾਹਦੇ ਛੱਡ ਗਿਆ ਫਿਰ ਇੱਥੇ ਇਹ ਜਾਣ ਬੁੱਝ ਕੇ ਬਲੈਕਮੇਲ ਕੀਤਾ ਸਾਨੂੰ ਜਾਂ ਫਿਰ ਮੂਰਖੇ ਸੀ ਉਹ ਆ ਤੂੰ ਕੌਣ ਜੀਵ ਨੂੰ ਕਿਹਾ ਗਿਆ ਪਰਮੇਸ਼ੁਰ ਦਾ ਕਹਾੜ ਹੈ ਕੋਲ ਕੋਈ ਨਹੀਂ ਉਹਦਾ ਕਹਾੜ ਹੈ ਅੱਛਾ ਜੀ ਉਹ ਸਿੱਧਾ ਆਪੇ ਕਹਿਣ ਲੱਗ ਗਿਆ ਕਹੋ ਕਿਉਂ ਮੈਂ ਮੰਨਦਾ ਤੇ ਕਹਿੰਦਾ ਜਿੱਤ ਕਿਉਂ ਨਹੀਂ ਗਿਆ ਉਹ ਜਿੱਤਦਾਰ ਹੋ ਜਾਏਗਾ ਰਹਿਣੇ ਦਾ ਦਫਾ ਹੋਣਾ ਇਹਦੀ ਸੀ ਰਹਿਣ ਅੱਛਾ ਜੀ ਆਓ ਹੁਣ ਤੁਸੀਂ ਉਹ ਬੰਦੇ ਵਸਾਂ ਮਾ ਦੀ ਗੱਲ ਮਸਾਂ ਬੰਦੇ ਮਿਹਰਬਾਨ ਹੋਇਆ ਓਏ ਕੱਲੇ ਖਾਤਰੇ ਟੱਬਰ ਫਸਿਆ ਪਿਆ ਸੀ ਜੇਲ੍ਹ ਚ ਟੱਬਰੇ ਛੁੱਟ ਜੂ ਠੀਕ ਹੈ ਜਾਂ ਤੂੰ ਤੁਸੈ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੀਂ ਗੁਰ ਕਾ ਮੰਤਰ ਕਿਹਨੇ ਕਮਾਉਣਾ ਐਸੇ ਨੇ ਕੋਣ ਉਹਨੂੰ ਕਹਿੰਦਾ ਸੱਚੀ ਤੇ ਸਮਝੇਗਾ ਤੂੰ ਵੀ ਸਾਰੀ ਗੱਲ ਮੰਨ ਲਈ ਆਗੀ ਨਾ ਹਾਂਜੀ ਮੰਨ ਚਾ। ਤਸੱਲੀ ਆਊਗੀ ਨਾ ਮਨ ਨੂੰ ਕਹੀ ਹੋਈ ਗੱਲ ਹਾਂਜੀ। ਬਸ ਇਹਦੇ ਵਾਸਤੇ ਮਿਹਰਬਾਨ ਲੱਭਾਇਆ ਪ੍ਰਭ ਨਹੀਂ ਆਇਆ। ਆਪਾਂ ਕਹਿੰਦੇ ਸਾਡੇ ਤੇ ਕਿਰਪਾ ਕਰ। ਵਿਆਹਣੇ ਨੂੰ ਨਹੀਂ ਕਹਿੰਦੇ। ਹਾਂਜੀ। ਤੂੰ ਆ ਗੱਲ ਮੰਨਦਾ। ਕੌਲਾ ਕੌਲਾ ਕਿਰਪਾ ਕਰ ਦਿੰਦਾ। ਸਾਡੇ ਹਾਲ ਤੇ ਰਹਿਮ ਕਰ ਕੁਝ। ਅਸੀਂ ਕੀ ਕਰਾਂ ਆ ਤੇਰੇ ਖਾਤੇ ਤੂੰ ਕੀ ਗੱਲ ਹੈ। ਹਾਂਜੀ ਨਹੀਂ ਸ ਕਲੀਅਰ ਹੋ ਗਈ ਜੀ ਗੱਲ ਅਹਲਾ ਪੰਜਵਾਂ ਕਿਤੀ ਬਹਿਣ ਬਹਿਣੇ ਮੁਚ ਵਜਾਇਨ ਵਜ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਰਹੀਆ ਲੱਜ ਕਿਤੇ ਬਹਿਣੀ ਬਾਰੇ ਸਾਡੇ ਵੀ ਨੇ ਛੋਟੀਆਂ ਨਾਲੇ ਵੀ ਨੇ ਅੱਛਾ ਨੇ ਬਹੁਤ ਉਪਦੇਸ਼ ਕਰਨੇ ਬਹੁਤ ਬਹੁਤ ਲੋਗ ਨੇ ਜਿੰਨੀਆਂ ਭੀੜਾਂ ਨਾਲ ਜਾਦਾ ਵੱਡੇ ਵੱਡੇ ਦਰਿਆ ਨੇ ਉਹ ਬਹਿਣ ਦਰਿਆ ਨੇ ਦਰਿਆ ਇਹਨੂੰ ਕਿਹਾ ਹੈ ਬਹਿਣ ਕਹਤੋਂ ਉਹਨੂੰ ਬਹਿਣ ਤੇ ਫਿਰ ਗੋਲੂ ਦਰਿਆ ਕਿਹਾ ਹੈ ਇਹਨਾਂ ਫਰਕ ਮੁੱਚ ਵਜਾਇਨ ਵਜੂੱਚ ਮੋਡੇ ਮੋਡੇ ਨੇ ਪਰ ਵਜਾਈ ਵਜਦੇ ਨੇ ਸਾਰੇ ਦੁਨੀਆ ਵਜਾਈ ਵਜਦੀ ਤੂੰ ਵਜੇ ਨਾਲ ਉਹ ਅਦੂਨੀਂ ਵਜਉਂਦੀ ਏ ਉਹਨੂੰ ਮਾਇਆ ਦੇ ਵਜਾਇ ਵਜਦੇ ਨੇ ਢੋਲ ਸਾਰੇ ਲੋਭ ਲੈਣ ਨਾਲੇ ਵਜਦੇ ਨੇ ਕੋਈ ਕਰੋਧ ਨਾਲ ਵਜਦਾ ਕੋਈ ਲੋਭ ਨਾਲ ਵਜਦਾ ਕੋਈ ਗੋਹ ਨਾਲ ਵਜਦਾ ਚੜਦੇ ਨੇ ਜੜਾਈਆਂ ਮੁਸਲਮਾਨ ਨੇ ਤੂਫਾਨ ਠਾਲਿਆ ਦੀ ਠੀਕ ਹੈ ਜੀ ਸੀ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਰਹੀਆ ਲੱਜ ਪਰ ਨਾਮ ਤੇ ਬਣਾ ਲੱਜ ਨਹੀਂ ਰਹੀ ਲੱਜ ਇਹਨਾਂ ਦੀ ਵੀ ਕਰਤੇ ਜਫਰ ਨਾਮ ਕਰਤਾ ਆਖਰੀ ਬਾਦਸ਼ਾਹ ਔਰੰਗਜ਼ੇਬ ਜਿਹੜਾ ਟੋਪੀਆਂ ਬਣਾ ਕੇ ਰੋਟੀ ਖਾਂਦਾ ਸੀ ਖਜਾਲੇ ਚ ਪੈਸਾ ਨਹੀਂ ਸੀ ਲੈਣਾ 24 ਘੰਟੇ ਬਾਹਲਾ ਹੱਥ ਚ ਰੱਖਦਾ ਸੀ ਕਹਿੰਦਾ ਸਾਰਿਆਂ ਨੂੰ ਇੱਕ ਬਣਾ ਕੇ ਛੱਡੂਗਾ ਮੈਂ ਅਵਤਾਰ ਵੇਲ ਲੱਜ ਕਰਤਾ ਲਾਜ ਚੱਕੀ ਗਈ ਆਖਰ ਮੰਨਣਾ ਪਿਆ ਵੀ ਬੇਗਲਤਾ ਤੂੰ ਠੀਕ ਹੈ ਠੀਕ ਹੈ ਕੋਈ ਬਹਿਣਾ ਅੱਜ ਤੱਕ ਲਾਜ ਦੀ ਬਚਾ ਸਕਿਆ ਸਵਾਇ ਗੁਰਮਤ ਤੇ ਕਿਸੇ ਨਾ ਰਹੀਆਂ ਲੱਜ ਕਿਸੇ ਦੀ ਲੱਜ ਨਹੀਂ ਰਹੀ ਅੱਜ ਅੱਜ ਕਾਲ ਦੇ ਸਾਹਮਣੇ ਕਿਸੇ ਦੀ ਜਿੰਨੀ ਬਚੀ ਸਾਰੇ ਬੇਪਰਦ ਕਰਤੇ ਕਾਲ ਦੇ ਬੇਪਰਦ ਕਹੇ ਨੰਦਾ ਦੋਜਿਕ ਚਾਲਿਆ ਆ ਕਪੜਾ ਲਾ ਕੇ ਢੁੰਗੇ ਕਰਕੇ ਦੋਸਤ ਜਦ ਜੇ ਕੀ ਜੀ ਨੂੰ ਲੁੱਧਾ ਕਰਕੇ ਸ਼ਹਿਰ ਜਿ ਘਵਾ ਕੇ ਨੀ ਪਛੋ ਤਾਵਲ ਇਹ ਗੱਲ ਦੀ ਵਿਆਖਿਆ ਹੈ ਇਹ ਉਹਦੀ ਠੀਕ ਹੈ ਜੀ ਪੌੜੀ ਧਿਆਨ ਬੇਦ ਕਿਤੇਬਾਂ ਸਣ ਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਅਦੂਅ ਬੇਦ ਆਲੇ ਆ ਤੈਨੂੰ ਤੇ ਉਹਦੇ ਨੇ ਦਰ ਖੜੇ ਉਮੀ ਤੇਰੇ ਬਾੜ ਗੱਡੀ ਜਾਂਦੇ ਨੇ ਇਕਲੱਦ ਬਾੜ ਕੋਈ ਪੁੱਠਾ ਕੇ ਗੱਲ ਤੇਰੇ ਦਰ ਖੜੇ ਇਹ ਇੱਥੇ ਹੁਣ ਕੀ ਦੀ ਗੱਲ ਹੋ ਰਹੀ ਆ ਵਿੱਦੂ ਗਿਰਾਂ ਮੁਸਲਮਾਨ ਵੀ ਇਹਨਾਂ ਦੇ ਸਾਣੇ ਖੱਥਾਂ ਚ ਕਤੇ ਬਾਹੋਂ ਜਵਾਂਦੀ ਰੀਹਣ ਨੇ ਸਾਏ ਕਤੇਬਾ ਲੈ ਕੇ ਖੜੇ ਤੇਰੇ ਦਸਤੇ ਕਾਟ ਕਰਦੇ ਨੇ ਕਾਂਨ ਨਾਲ ਕਰਤਾ ਤੇਰਾ ਹੀ ਧਰਕੇ ਕਰਦੇ ਨੇ ਕੁਝ ਮਿਲੂਗਾ ਠੀਕ ਹੈ ਜੀ ਤਾਂ ਤਾਰਦੀ ਦਾ ਕਾਰ ਆ ਬਾਅਦ ਚ ਤਾਂ ਦੱਸੇ ਦਿੰਦੇ ਨੇ ਕਾਰ ਜਾਂ ਅਰਦਾਸ ਕਰਦੇ ਨੇ ਕਰਤਾ ਆਪੇ ਦੱਸ ਦਿੰਦੇ ਨੇ ਉਹ ਕੀ ਐ ਬਦੌਰਤ ਕੀ ਸੀ ਉਹ ਆਪੇ ਦੱਸ ਦਿੰਦੇ ਨੇ ਪੁੱਛਣ ਦੀ ਲੋੜ ਨਹੀਂ ਉਹਨੇ ਲੋਕਿਆ ਰੱਖਦੇ ਨੇ ਪੈਮਾਨ ਦੀਆਂ ਨਾ ਜਾਏ ਤੇਰੇ ਦਰ ਪੜੇ ਕਿੰਨੇ ਤੇਰੇ ਦਰ ਤੇ ਪੜੇ ਨੇ ਦੀ ਗਣਤੀ ਗਣੀ ਨਹੀਂ ਜਾ ਸਕਦੀ ਕਿੰਨੇ ਲੋਕ ਇਹ ਕਾਬੂ ਹੋਏ ਨੇ ਧਰਮ ਦੇ ਇਹਦੀ ਵੀ ਗਿਣਤੀ ਨਹੀਂ ਦੱਸੀ ਜਾ ਸਕਦੀ ਅੱਛਾ ਜੀ ਕੋਈ ਕਿਸੇ ਧਰਮ ਨਾਲ ਜੁੜਿਆ ਕੋਈ ਕਿਸੇ ਨਾਲ ਜੁੜਿਆ ਕੋਈ ਕਿਸੇ ਨਾਲ ਜੁੜਿਆ ਕੋਈ ਕਿਸੇ ਨਾਲ ਆਪਣੇ ਆਪ ਜੋ ਧਰਮ ਹੀ ਕਰ ਰਹੇ ਹਨ ਬ੍ਰਹਮੇ ਤੁਦ ਧਿਆਨ ਇੰਦਰ ਇੰਦਰਾਸਨਾ ਸ਼ੰਕਰ ਵਿਸ਼ਨ ਅਵਤਾਰ ਹਰਜਸ ਮੁਖਪਨ ਬ੍ਰਹਮੇ ਉਹ ਵੀ ਧਿਆਨ ਤੇ ਰੱਖਦੇ ਨੇ ਆ ਵੀ ਹੋ ਗਿਆ ਵੱਧ ਹੋ ਗਿਆ ਹਾਂ ਬ੍ਰਹਮਾ ਕਿਤੇ ਇੱਕ ਆਪਕੇ ਜੋ ਪੜਦੇ ਨੇ ਸਾਰੇ ਬ੍ਰਹਮੇ ਨੇ ਇਹ ਸ਼ਬਦ ਵਿਚਾਰ ਚ ਲੱਗੇ ਨੇ ਸਭ ਬ੍ਰਹਮੇ ਠੀਕ ਹੈ ਜੀ ਬ੍ਰਹਮੇ ਤੁਦ ਧਿਆਨ ਇੰਦਰ ਤੇਰਾ ਮੇਰਾ ਰਾਜ ਕਾਇਮ ਰੱਖੀ ਦੱਸਦਾ ਰਹਿੰਦਾ ਇਹ ਠੀਕ ਹੈ ਜੀ ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖਪਣਾ ਸ਼ੰਕਰ ਵਿਸ਼ਨ ਅਵਤਾਰ ਉਹ ਵੀ ਹਰ ਜਸ ਤੇਰਾ ਜਸ ਗੋਬਿੰਦ ਇਹਦਾ ਮਤਲਬ ਹੈ ਤੇਤੋਂ ਸਾਡੇ ਛੋਟੇ ਨੇ ਇੱਕ ਗੱਲ ਤਾਂ ਕਹਿ ਤੀ ਤੂੰ ਇਹ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਜੀ ਹਰੇ ਬੜਾ ਉਹਨਾਂ ਨਾਲੋਂ ਤਾਂ ਪਰਮੇਸ਼ਰ ਤਾਂ ਛੱਡੋ ਤੁਸੀਂ ਅੱਛਾ ਦੀ ਅੰਤਰਾਤਮਾ ਹੀ ਖੁਦ ਉਹ ਕਰ ਲਈ ਹੈ ਉਹਨਾਂ ਅੱਗੇ ਚਲਾ ਗਿਆ ਉਹ ਵੀ ਮਾਮੂਲੀ ਜੀਵੇ ਨੇ ਸਾਡੇ ਵਰਗੇ ਠੀਕ ਹੈ ਜੀ ਸਾਡੇ আর ਉਹਨਾਂ 'ਚ ਕੋਈ ਫਰਕ ਨਹੀਂ ਜੀ ਸਾਡੇ ਲੈਵਲ ਦੇ ਹੀ ਦੇ ਹੋ ਇਨਾ ਜਲਮਨ ਲੈ ਲਿਆ ਜਿਹੜਾ ਅੱਜ ਬਣ ਗਿਆ ਉਹ ਕਲਾਸ ਕੋਈ ਚੌਥੀ ਚਾ ਕੋਈ ਅੱਠਵੀਂ ਚਾ ਕੋਈ ਬਰਵੀਂ ਚਾ ਕੋਈ ਪਹਿਲੀ ਚਾ ਕੋ ਦੂਜੀ ਚ ਪਰਦੇ ਤਾਂ ਸਾਰੇ ਹੀ ਸ਼ੰਕਰ ਅਵਤਾਰ ਹਰ ਜਸ ਮੁਖ ਠੀਕ ਹੈ ਪੀਰ ਪਿਕੰਬਰ ਸੇਖ ਮਸਾਇਕ ਔਲੀਏ ਹੋਤ ਪੋਤ ਨਿਰੰਕਾਰ ਘਟ ਘਟ ਮੌਲੀਏ ਜਿਵੇਂ ਮੁਸਲਮਾਨਾਂ ਨੇ ਪੀਰ ਪਗਬਰ ਉਸਾਇਕ ਇਹ ਵੀ ਸਾਰੇ ਤੇਰੇ ਨਾਲ ਜੁੜੇ ਨੇ ਉਹਨਾਂ ਦੇ ਵੀ ਤੇਰੇ ਕਰਕੇ ਭਿੱਜੇ ਹੋਏ ਸੀ ਇਹਨਾਂ ਨੇ ਵਣ ਭਿੱਜੇ ਦਿਖਾ ਦਿੱਤਾ ਇਹਨਾਂ ਦੇ ਉੱਤੇ ਅਸਰ ਦਿਖਾਇਆ ਹੋਇਆ ਹੈ ਉਹਨਾਂ ਤੇ ਅਸਰ ਦਿਖਾਇਆ ਨਹੀਂ ਹੋਇਆ ਪੜਦੇ ਨੇ ਖੁਸ਼ਕ ਨਹੀਂ ਹੋ ਸਾਰੇ ਅੱਛਾ ਜੀ ਵੇਦਕ ਦੇ ਨੇ ਖੁਸ਼ ਕਰੇ ਇਹ ਬੋਲੀ ਇਹ ਦਿਖਾਇਆ ਹੋਇਆ ਕਿ ਕਾਣੇ ਨੇ ਨਾ ਹੈ ਉਹ ਜੁੜੇ ਹੋਏ ਨੇ ਮਿੱਟੀ ਨਾਲ ਬਾਹਰ ਅੱਛਾ ਜੁੜੇ ਹੋਏ ਨੇ ਮਾਇਆ ਨਾਲ ਇਹ ਮਾਇਆ ਨਾਲ ਨਹੀਂ ਜੁੜੇ ਹੋਏ ਇਹ ਬੋਲੀਏ ਨੇ ਇਹਨਾਂ ਦਾ ਅੰਦਰ ਭਿੱਜਿਆ ਹੋਇਆ ਥੋੜਾ ਬਹੁਤ ਇਹਨਾਂ ਦੇ ਉੱਤੇ ਅਸਰ ਬਿਲਕੁਲ ਦੇ ਨੇ ਪਰਪਲਾਈ ਹੈ ਸਾਰਾ ਸੁੱਕਾ ਖੁਸ਼ਕੀ ਹੈ ਓਤ ਪੋਤ ਨਿਰੰਕਾਰ ਘਟ ਘਟ ਮੌਲੀਏ ਨਿਰੰਕਾਰ ਦਾ ਸਾਲਿਆਂ ਦੇ ਵਿੱਚ ਉਹ ਹੈ ਉਹਦਾ ਓਤ ਬਹੁਤ ਹੈ ਉੱਤੇ ਉਹਦਾ ਅਸਰ ਵੀ ਹੈ ਉਹਨਾਂ ਅੰਦਰ ਦਾ ਹੋਇਆ ਕਿਸੇ ਠੀਕ ਹੈ ਜਿੰਨਾ ਕਿਸੇ ਨੇ ਬੰਨਿਆ ਹੋਇਆ ਉਹਨਾ ਕਰਦਾ ਉਹਦਾ ਚਾਹੇ ਉਹ ਹਿੱਦੂ ਆ ਚਾਹੇ ਬੋਧੀ ਆ ਜਾਂ ਮੁਸਲਮਾਨ ਹੈ ਗੱਲ ਗੋਲ ਬੋਲ ਕਰਤੀ ਕਿ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਹੀ ਖੁਸ਼ ਕਰੀ ਜਿੱਤੇ ਉਹ ਬੋਧ ਰੰਕਾਰ ਹੈ ਜਿੱਤੇ ਰੰਕਾਰ ਕਰਕੇ ਜਿਹੜੇ ਹਿੰਦੇ ਨੇ ਰੋਦੇ ਆ ਉਹਦਾ ਹਰਦਾ ਪਿੱਛਾ ਹੋਇਆ ਠੀਕ ਹੈ ਕੂੜੋਂ ਕਰੇ ਵਿਨਾਸ਼ ਧਰਮੈ ਤੱਗੀ ਹੈ ਜਿਤ ਜਿਤ ਲਾਈਐ ਆਪ ਤਿੱਤ ਤਿੱਤ ਲੱਗੀ ਹੈ ਕੂੜੋਂ ਕਰੇ ਬਨਾਸ ਉੜਦੀ ਹੈ ਜਿੱਦਲ ਜਰ ਜੀਵਨ ਜੁੜਿਆ ਕੂੜ ਨਾਲ ਜੁੜੇ ਜੀਵ ਦਾ ਨਾਸ ਕਰਨਾ ਹੀ ਗੱਲ ਹੈ ਕੂੜੋਂ ਕਰੇ ਬਨਾਸ ਧਰਮੇ ਤੱਗੀ ਦੇ ਧਾਗੇ ਦੇ ਨਾਲ ਜੋੜਦਾ ਕੂੜ ਤੋਂ ਤੋੜ ਕੇ ਅੱਛਾ ਬਾਹਰੋਂ ਤੋੜ ਕੇ ਅੰਦਰ ਜੋੜਦਾ ਸੱਚ ਨਾਲ ਅੰਦਰ ਧਰਮ ਰਾਜ ਹੈ ਨਾ ਠੀਕ ਹੈ ऐसे सारे ही लोग बारें तोड़ के अंतरात्मा दी आवाज ना जोड़ने दी गल करते दे। हैं ठीक है सारे करते हैं जित जित लाए हैं आप तित तित लगी है वो जित द जित लाए तो तो तो ने उतना उतना लगे हैं हां ये मुवा मानते ने करते ने कुछ और वो कहते ਜਿੱਤ ਜਿੱਤ ਲਾਹੇ ਆਪ ਆਪ ਆਏਗਾ ਅਖਰ ਜਿਹੜੇ ਆਪੇ ਲਾਇਦੇ ਥੱਲੇ ਨੇ ਔਰ ਕਿਨਾਂ ਲਾਇਦੇ ਗੁੱਦੀ ਦੇ ਹਲਬਾਂਦੇ ਨੇ ਨਾ ਚਿੱਤਾ ਦੇ ਠੀਕ ਹੈ ਜੀ ਫਟੇ ਹੋ ਕੇ ਲਾਇਦੇ ਉਧਰੇ ਲੱਗੇ ਠੀਕ ਹੈ